ਸੋ ਲੋਕ ਮਹੱਲਾ ਤੀਜਾ ਵਾਹ ਵਾ ਇਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾ ਇਸ ਨੂੰ ਆਖੀਐ ਜੇ ਗੁਣ ਦਾਤਾ ਮਤ ਉਹ ਵੱਲਾ ਹੋਵੇ ਕਹਿਰ ਕੋਈ ਰੋਕਾ ਗਹਿਰਾਈ ਐਂਦੀ ਹੋਵੇ ਉਹਦੀ ਗਿਆਨ ਦੀ ਗਹਿਰਾਈ ਐਂਦੀ ਹੋਵੇ ਉਹ ਨਾਪੀ ਨਾ ਜਾ ਸਕੇ ਜੇ ਜੀਵਨ ਸੱਚ ਬੋਲਦਾ ਹੋਵੇ ਉਹਦੀ ਗਹਿਰਾਈ ਦਾ ਸੱਚੇ ਦੀ ਨੋਕੀ ਜਾਂਦੀ ਹੈ ਠੀਕ ਹੈ ਸਾਰੇ ਆਦਮੀ ਅਲੱਗ ਖੋਟੇ ਘਰਾਂ ਦੀ ਪਛਾਣ ਗੁਰਮੁਖੀ ਤੋਂ ਗੁਰਮੁਖੀ ਤੋਂ ਨਾ ਖੋਟੇ ਘਰੇ ਦੀ ਪਛਾਣ ਨਹੀਂ ਇਹ ਸਾਰੇ ਲੋਕਾਂ ਨੂੰ ਖੋਟੇ ਘਰੇ ਦੀ ਪਛਾਣ ਹੋਵੇ ਐਸਾ ਦੇ ਧਰਮ ਆਪੇ ਤਾਂ ਹੋ ਜਾਣ ਸਾਰਿਆਂ ਹੱਥਾਂ ਚੱਲੇ ਨਾ ਸਹੁਰੇ ਵਾਹ ਵਾ ਤਿਸ ਨੂੰ ਆਖੀਏ ਜੇ ਸੱਚਾ ਗਹਿਰ ਗੰਭੀਰ ਸੁਭੀਰ ਵਾਹ ਵਾ ਤਿਸ ਨੂੰ ਆਖੀਏ ਜੇ ਗੁਣ ਮਤ ਧੀਰ ਵਾਹ ਵਾ ਤਿਸ ਮਤ ਧੀਰ ਹੁਣ ਤੂੰ ਇਹਨੂੰ ਆ ਗਈ ਵਾਹਾਂ ਪਰਮੇਸ਼ਰ ਤੋਂ ਛੱਡ ਕੇ ਬੁਲਾਉਣ ਵਾਲੇ ਤੋਂ ਛੱਡ ਕੇ ਬੋਲਣ ਵਾਲੇ ਤੇ ਆ ਗਈ ਅੱਛਾ ਜੀ ਗੁਣ ਦਾਤਾ ਹੋਈ ਹੈ ਧੀਰ ਮਤ ਵਾਲਾ ਉਹਨੇ ਪਾਤਵਰ ਮੈਸ਼ਰ ਦੀ ਹੋਈ ਹੈ ਉਹਦੇ ਕੋਲ ਉਹ ਤਾਂ ਕਹਿੰਦਾ ਮੈਂ ਨਹੀਂ ਕਿਹਾ ਨਹੀਂ ਆਪ ਸਭ ਗੱਲ ਤੇ ਪਰ ਫੇਰ ਵੀ ਸੱਚ ਖੜਨਾ ਵਾਲੋਂ ਕਿੰਨੀ ਗਰੈਟ ਹੈਗੀ ਜੇ ਉਹਨੂੰ ਤੁਸੀਂ ਵਾ ਵ ਕਹਿ ਵੀ ਦਵਾਂ ਹਾਂ ਤੇ ਵਧਾਈ ਕਰਦੀ ਦਵਾਂ ਤਾਂ ਪਾਪ ਦੀ ਹੈ ਅਚੇਤ ਤਾਂ ਵਧਾਈ ਕਰ ਵੀ ਰਹੂੰ ਤੁਸੀਂ ਤਾਂ ਪਾਪ ਦੀ ਹੈ ਉਹ ਸੱਚੀ ਗੱਲ ਕਰਦਾ ਹੋਣਾ ਆਪਣੀ ਕਰਦਾ ਜੇ ਭਗਤੀ ਵਧਾਈ ਕਰੋਗੇ ਉਹ ਭਗਤੀ ਵਧਾਈ ਨਹੀਂ ਉਹ ਵੀ ਪਰਮੈਸ਼ਰ ਦੀ ਵਧਾਈ ਹੈ ਠੀਕ ਹੈ ਆਪਣੀ ਦਾ ਕਰਦਾ ਹੀ ਜੇ ਸਭ મે ਰਹੈ ਤੇ ਸਮਾਇਆ ਹੋਇਆ ਹੈ ਸਾਰੇ ਚਿੱਤ ਕਰਕੇ ਸਮਾਇਆ ਹੋਇਆ ਸੱਚ ਕਰਕੇ ਸਮਾਇਆ ਹੈ ਜਿੱਥਾ ਉਹਦਾ ਸੱਚਾ ਸੱਚੇ ਸਾਰੇ ਵਿੱਚ ਸੱਚਾ ਜਦੋਂ ਸਾਰਿਆਂ ਤੇ ਸਮਾਇਆ ਹੋਇਆ ਜਿਹੜਾ ਸਾਲ ਹੈ ਜਿਹੜਾ ਸੱਚ ਕਾਲ ਨਾਲ ਜੁੜਿਆ ਹੋਇਆ ਹੈ ਉਹ ਵਾਵਾ ਹੀ ਹੈ ਅੰਤਰ ਆਧਵਨੀ ਵਾਵਾ ਹੀ ਹੈ ਉਹਦੀ ਵਧਾਈ ਕਰਨ ਦੀ ਬਣਦੀ ਹੈ ਉਹਦੀ ਵਧਾਈ ਆਖੀਏ ਜੇ ਦੇਂਦਾ ਨੂੰ ਤੇ ਜਾਂਦਾ ਉਹ ਹੁਕਮੰਦ ਜਿਹੜਾ ਵਿੱਚ ਮੱਕਮੇ ਦੀ ਇਹ ਜਿਹੜਾ ਕਹਿੰਦਾ ਦੱਦਾ ਦਾਤਾ ਏ ਕਹੇ ਸਭ ਕੋ ਦੇਵਨ ਹਾਰ ਸਿੱਧੇ ਤੋੜਣਾ ਆਵੇ ਅਗਨਤ ਭਰੇ ਭਨਾਰ ਉਹ ਵੀ ਵਿਵਾਹ ਕਹਿ ਸਕਦੇ ਸੱਚ ਦਾ ਬੋਲਦਾ ਹੈ ਉਹ ਅਗਈ ਦਾ ਕਾਲੇ ਨੇ ਖਰੀ ਗਈ ਸਾਰੇ ਬੰਦੇ ਰੱਟ ਜਿਹੜੇ ਬਣੇ ਬੈਠੇ ਸੀ ਦਾਤਾ ਆਪੇ ਆਪਣੇ ਨਾਲ ਫਸਤੀ ਪਾਲੀ ਆਪਣੇ ਅਰਿਸਕ ਦਾ ਲੈ ਲਿਆ ਉਹਨੇ ਆਪਣਾ ਕਹਿ ਕੇ ਆਪਣੇ ਨਾਲ ਦਾ ਫਾਹਾ ਪਾ ਲਿਆ ਪਰ ਸੱਚ ਬੋਲਦਾ ਓਦੀ ਵੀ ਵਡਿਆਈ ਕਰਦੀ ਬਣਦੀ ਹੈ ਚਾਇਜ਼ ਹੈ ਤੇ ਪਰਮੇਸ਼ਰ ਦੀ ਗੱਲ ਕਰਦਾ ਨਾ ਪਰਮੇਸ਼ਰ ਨੂੰ ਵੱਡਾ ਹੈ ਉਹ ਸਾਬਤ ਕਰਦਾ ਪਰਮੇਸ਼ਰ ਨੂੰ ਬਾਕੀ ਸਾਬਤ ਨਹੀਂ ਕਰਦੇ ਡਰਪੋਕ ਦੀ ਵਡਿਆਈ ਕਰਦੀ ਬਣਦੀ ਹੈ ਨਾਨਕ ਵਾਹ ਵਾਹ ਇੱਕੋ ਕਰ ਸਲਾਹੀਏ ਇਹ ਸਤਿ ਦੀਆ ਦਿਖਾਈ ਕੋਈ ਹੈ ਵਾਹ ਵਾਹ ਅਸਲ ਦੇ ਵਿੱਚ ਸਤਗੁਰੂ ਨੇ ਜਿਹੜਾ ਦਿਖਾਇਆ ਦਿਖਾਇਆ ਸਤਗੁਰੂ ਨੇ ਦਿਖਾਇਆ ਉਹ ਵਾਹ ਵਾਹ ਇਹ ਸਤਗੁਰੂ ਉਹਦੇ ਵਿੱਚ ਸਮਾਇਆ ਹੋਇਆ ਹੀ ਹੈ ਅਸਲ 'ਚ ਸਤਗੁਰੂ ਉਹਦੇ ਵਿੱਚ ਸਮਾਇਆ ਹੋਇਆ ਹੈ ਜਿਸ ਦੀ ਵਡਿਆਈ ਕਰ ਰਿਹਾ ਸਤਗੁਰੂ ਉਸ ਦੇ ਵਿੱਚ ਵੜਿਆ ਹੋਇਆ ਤਾਂ ਵਿੱਚ ਸਤਗੁਰੂ ਵੀ ਵਡਿਆਈ ਹੋ ਰਹੀ ਹੈ ਵਿੱਚ ਉਹ ਵੀ ਦੇ ਵਿੱਚ ਵੜਿਆ ਹੋਇਆ ਹੈ ਬੁੱਧਰ ਦੀ ਜੇ ਵਡਿਆਈ ਕਰ ਰਿਹਾ ਤਾਂ ਸੁਬੁੱਧਰ ਦੇ ਵਿੱਚ ਉਹ ਵੀ ਹੈ ਉਹ ਬੱਤੀ ਹੈ ਜੇ ਨਾ ਪਾਣੇ ਦੇ ਵਿੱਚ ਨਾ ਜੇ ਪਾਣੇ ਦੀ ਵਿੜਾਈ ਹੁੰਦੀ ਆ ਉਹਾਂ ਦੀ ਵਿੱਚ ਹੀ ਹੋ ਜਾਂਦੀ ਆ ਆਪੇ ਹੋ ਜਾਂਦੀ ਆ ਇਕੱਲੇ ਇਕੱਲੇ ਦੀ ਵਿੜਾਈ ਗੱਲ ਨਹੀਂ ਜੋਗਦੀ ਜੇ ਇਕੱਲੇ ਇਕੱਲੇ ਦੀ ਵਿੜਾਈ ਕਾਦੀ ਜੋਗ ਨਹੀਂ ਆ ਹੋਏ ਤੇਰੇ ਦਾਸਨ ਦਾਸਾ ਦਾਸਨ ਬਹੁਤ ਜਰੂਰ ਵਰਤੇ ਜਿੰਨੇ ਦਾਸ ਨੇ ਸੱਚ ਘਰਾਂ ਵਿੱਚ ਸਾਰੇ ਦਾਸ ਨੇ ਠੀਕ ਹੈ ਤੇਰੇ ਕਿਉਂ ਵੀ ਤੇਰੇ ਹੁਕਮ ਰੂਪ ਹੈ ਸੱਜ ਖੜਦੇ ਵਾਸੀ ਸਾਰੇ ਹੁਕਮ ਦੇ ਦਾਸ ਨੇ ਉਹ ਵੀ ਦਾਸ ਸੱਜ ਖੜਦੇ ਵੱਡਾ ਦਾ ਹੁਕਮ ਹੈ ਹੁਕਮ ਹੈ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਜਿਹੜੇ ਹੁਕਮ ਦੇ ਅਧੀਨ ਨੇ ਹੁਕਮ ਦੇ ਨਾਲ ਅਸਲ ਤੇ ਹਾਕਮ ਨੇ ਜਿਹੜੇ ਹੁਕਮ ਦੇ ਨਾਲ ਖੜੇ ਹੁੰਦੇ ਨੇ ਪੈਰਾ ਦੇ ਹੁੰਦੇ ਨੇ ਹੁਕਮਦਾਰ ਪੈਰਾ ਘੋਲਦੇ ਹੁੰਦੇ ਨੇ ਲੋਕਾਂ ਦੇ ਹੁਕਮ ਦਾ ਉਹ ਅਗ ਹੁੰਦੇ ਨੇ ਜੇ ਸੁਪਰੀਮ ਕੋਰਟ ਦਾ ਜੱਜ ਹੁਕਮ ਨੂੰ ਐਪਲੀਕੇਬਲ ਕਰਦਾ ਹੈ ਤਾਂ ਹਕਮ ਤਾਂ ਤਾਹੀ ਹੈ ਇਹ ਥਾਣੇਦਾਰ ਹੁਕਮ ਨੂੰ ਐਪਲੀਕੇਬਲ ਕਰਦਾ ਹੈ ਹਕਮ ਤਾਂ ਤਾਹੀ ਹੈ ਉਹ ਕਿ ਤਹਿਸੀਲਦਾਰ ਹੁਕਮ ਅਨੁਸਾਰ ਫੈਸਲੇ ਸੌਂਦਾ ਹੁਕਮ ਨੂੰ ਐਪਲੀਕੇਬਲ ਕਰਦਾ ਹੈ ਤਾਂ ਹਕਮ ਹੈ ਉਹ ਫੇਰ ਵੀ ਹੁਕਮ ਵੱਡਾ ਮਕਬਟਾ ਉਹ ਕਾਹਦੇ ਹੁਕਮ ਕਰ ਨੋਣਾ ਗਏਦਾ ਸਾਹਮਣੇ ਹਨ ਆਪਣੇ ਆਪ ਨੂੰ ਨੀਵਾ ਕਰਕੇ ਦਿਖਾਉਣ ਦੇ ਹੁਕਮ ਤੋਂ ਹਾਂਜੀ ਜਿਹੜਾ ਇੱਕੋ ਕਰ ਸਲਾਹੀ ਹੈ ਇਹ ਉਹ ਜਿਹੜਾ ਅਨੇਕ ਹੈ ਫਰੇਕ ਹੈ ਹੁਕਮ ਦੀ ਗੱਲ ਹੋ ਰਹੀ ਹੈ ਦੋਨੇ ਪਾਵੇਂ ਹੱਥ ਮਾਰੋ ਹੁਕਮ ਹਾਂਜੀ ਪਰ ਇਹਦੀ ਇੱਕ ਰੂਪ ਜਿਹਾ ਸਲਾਹ ਹੋ ਰਹੀ ਹੈ ਸੁਰੂ ਕੀਤਾ ਸੀ ਨਾ ਮੈਂ ਤੋਂ ਮੈਂ ਉਹਨ ਬੋਲਣ ਵਾਲੇ ਦੀ ਛਲਾਂ ਹੈ ਹਾਂ ਇੱਕ ਬੋਲ ਹੈ ਬੋਲਿਆ ਹੋਇਆ ਉਹ ਹੁਕਮ ਹੈ ਇੱਕ ਬੋਲਣ ਵਾਲਾ ਹੈ ਬੋਲਣ ਵਾਲੇ ਤੇ ਗੱਲ ਚੱਲ ਪਈ ਰੂਪ ਜਿਹਲਾਂ ਦਾ ਚੱਲਦੀ ਹੈ ਬੋਲਣ ਵਾਲੇ ਦੀ ਯਾਰ ਬੋਲਦੀ ਹੂੰ ਹੁਕਮ ਹੀ ਯਾਰ ਹੱਕ ਬੋਲਣ ਵਾਲਾ ਹੱਦਾਂ ਪਰ ਹੱਦਾਂ ਕੋਦੇ ਹੁਕਮ ਦੇ ਅਧੇਨ ਬੈਸਾ ਦੇ ਰਿਹਾ ਆਪਣੇ ਆਪ ਨੂੰ ਹੁਕਮ ਦੇ ਅਧੀਨ ਮੰਨ ਕੇ ਫੈਸਲਾ ਦੇ ਰਹੇ ਆਪਣੀ ફરਜੀ ਨਹੀਂ ਕਰ ਰਹੇ ਹੋ ਉਹ ਕਹੇ ਆਹ ਕਰੂ ਆ ਗੈਰ ਹੈ ਇਹ ਥਾਰਾ ਦੇ ਤਹਿਤ ਮੈਂ ਆ ਛੋਟਾ ਹੋਇਆ ਵੱਡੀ ਤਾਂ ਥਾਰਾ ਹੋਈ ਹੁਕਮ ਦੇ ਠੀਕ ਹੈ ਜੀ ਮਹੱਲਾ ਤੀਜਾ ਵਾ ਵਾ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਕ ਖਾਏ ਉਨਾ ਵਾਹ ਵਾਹ ਨਾ ਭਾਈ ਦੁੱਖ ਹੈ ਦੁੱਖ ਵਿਹਾਈ ਵਾਹ ਵਾਹ ਗੁਰਮਤਿ ਜਦਾ ਗੁਰਮੁਖੀ ਸਦਾ ਵਾਹ ਉਸ ਕਰਦੇ ਨੇ ਪਰਮੇਸ਼ਰ ਤੇ ਵਾਹ ਗੁਰੂ ਨਹੀਂ ਆਇਆ ਵਾਹ ਵਾਹ ਆਇਆ ਲਖ ਵਾਹ ਵਾਹ ਵਾਹ ਕਰ ਰਿਹਾ ਤੋ ਪੇਚ ਹੋ ਗਏ ਗੁਰੂ ਕਿਤੇ ਵੀ ਨਹੀਂ ਆਇਆ ਸ਼ਰਧਾਲੂ ਗੁਰੂ ਬਾੜੇ ਵਾਹ ਵਾਹ ਕਰੀਏ ਹਸਬ ਮਗਵ ਨਹੀਂ ਕਰਦੀ ਬਾਲਾ ਕੋਰਮ ਦੀ ਸਦਾ ਕਰਿਆ ਕੋਈ ਕੋ ਸਦਾ ਹੀ ਵਾਵਾ ਕਰਦੇ ਆਪਣੇ ਨਹੀਂ ਕਰਦੇ ਆਪਣੀ ਕਰੀਦੀ ਨਹੀਂ ਹੁੰਦੀ ਆਪਣੀ ਖਰਾਈ ਦੀ ਹੁੰਦੀ ਹੈ ਆਪਣੀ ਕਰੀਦੀ ਆਪਣੀ ਗੱਲ ਦਾ ਜੋ ਭਲਾ ਕਹਾਵਾ ਕਹਾਵਾ ਲੱਗ ਰਿਹਾ ਤੇ ਕਹੇ ਤਵੱਤਿਆ ਨਹੀਂ ਤੁਸੀਂ ਨੂੰ ਕਹੇ ਯਾ ਲੋ 5 500 ਦੇ ਹਜ਼ਾਰ ਜਾਨ ਨੋਟ ਤੁਸੀਂ ਮੈਨੂੰ ਮੱਥਾ ਟੇਕਿਓ ਤਾਂ ਮੇਰੀ ਬਲੇ ਬਲੇ ਹੋਊਗੀ ਉਹ ਦੂਏ 100 ਦਾ ਤਾਂ ਟੇਕਣ ਗਈ ਪੰਜ ਵਾਲੇ ਦਾ ਲੈਣ ਚ ਰਿਜਲ ਦਾ ਭਾਣ ਤੇ ਕੱਟਾ ਵੀ ਜੱਤ ਦਾ ਨੀਣਾ ਕੋਈ ਵਾਹ ਵਾਹ ਜਿਹੜਾ ਅੱਖਰ ਹੈ ਜੀ ਏ ਇਸ ਤਰ੍ਹਾਂ 57 ਬਹਰੋਂ ਦਾ ਬਾਣੀ ਤੇ ਹਮੇਸ਼ਾ ਇਕੱਠਾ ਹੁੰਦਾ ਵਾਹ ਵਾਹ ਹਾਂਜੀ ਵਾਬਾ ਗੁਰਮੁਖ ਸਦਾ ਕਰੇ ਮਨਮੁਖ ਨਾ ਭਾਵੇਂ ਦੁੱਖੇ ਦੁੱਖ ਵੀ ਹਾਂਈ ਗੁਰਮੁਖ ਬਾਲਿਆ ਵਿਖਾਏ ਗੁਰਮੁਖਨ ਵਿਖਾਏ ਕਿਉਂ ਮਨਮੁਖ ਨੇ ਜਿੱਥੋਂ ਉਹਨਾਂ ਨੂੰ ਮਾਇਆ ਮਿਲੇ ਠੀਕ ਹੈ ਨਾਲੇ ਉਹ ਖਾਤਰ ਕਰਦੇ ਨੇ ਹੂੰ ਹੂੰ ਗੁਰਮੁਖ ਵੀ ਵਾਵਾ ਕਰਦੇ ਨੇ ਉਹ ਉਹਦੀ ਗੱਲਦੇ ਨੇ ਜਿੱਥੋਂ ਕੁਝ ਮਿਲੇ ਕਿ ਮਾਇਆ ਦੇ ਸਿੰ ਗੁਰੂ ਗ੍ਰੰਥ ਸਾਹਿਬ ਦੀ ਬੜੀ ਬਿਟਿਆਈ ਕਰਦੇ ਆ ਵਾਵਾ ਕਰਦੇ ਆ ਮੰਗਦੇ ਆ ਮਾਇਆ ਮਰਦੇ ਆ ਤਾਂ ਹੀ ਜਮਨ ਮੁਕਤੀ ਨਹੀਂ ਹੋਈ ਇਹ ਸਾਰੇ ਮਨਮੁਖਾ ਬੇਗੁਨਾ ਦੇ ਮਰ ਰਹੇ ਆ ਉਠੋ ਕੇ ਆਪਣੀ ਗੱਲ ਕਰ ਉਸ ਵੇਲੇ ਮੂਰਤੀ ਦੇ ਸੰਦਰਭ ਬਣਾਈ ਹੋਈ ਇਹ ਗੁਰ ਮੂਰਤ ਮਨ ਵਿੱਚ ਮਨਮੁਖ ਮਰੇ ਬਿਖ ਕਹਿੰਦੇ ਖਾ ਕੇ ਮਰ ਜੇ ਵਾਵਾ ਕਰਦੇ ਨਹੀਂ ਦੇ ਉਹ ਭਾਇਆ ਵੀ ਵਾਵਾ ਕਰਦੇ ਨੇ ਭਾਇਆ ਹੀ ਮੱਦਦੇ ਨੇ ਬਿਦ ਖਾ ਕੇ ਵਰਤੇ ਰਹਿੰਦੇ ਹੋਈ ਜੇ ਖਾ ਕੇ ਮਰਿਆ ਨਾ ਉਹਦਾ ਜ਼ਹਿਰ ਤੁਹਾਡੀ ਦੇ ਨਹੀਂ ਵਿਗਦੀ ਜੇ ਖਾ ਕੇ ਆਦੀ ਮਰੇ ਨਾ ਚੈਰ ਖਾਦੀ ਹੈ ਜਿਹੜੀ ਫਸਾਣਾਂ ਠੀਕ ਹੈ ਜੀ ਮਨ ਬਿਖ ਖਾਏ ਉਹਨਾ ਵਾਵਾ ਨਾ ਭਾਵਾਈ ਦੁੱਖ ਹੈ ਦੁੱਖ ਵਿਹਾਂ ਉਹਨਾਂ ਵਾਵਾ ਨਹੀਂ ਭਾਉਂਦੀ ਚੰਗੀ ਲੱਗਦੀ ਗੁਰਦੁਆਰੇ ਵਾਲਿਆਂ ਨੂੰ ਇਹ ਸੁਪਰਮੈਸ਼ਨ ਦੀ ਵਿਆਖਿਆ ਇੱਕ ਵਾਰ ਜੰਦੀ ਲੱਗੇ ਇਹ ਤਾਂ ਬਦਲਤੀ ਸੀ ਬਹੁਤ ਪਹਿਲਾਂ ਜਾਣ ਕੇ ਪਰ ਉਹਨੂੰ ਕਿੱਥੇ ਜੰਦੀ ਲੱਗਦੀ ਸੀ ਜਦੋਂ ਆਾਇਆ ਦੀ ਦੁੱਖ ਪੈਦਾ ਹੋ ਗਈ ਸੀ ਨਾ ਜ਼ਹਿਰ ਦੀ ਜਦੋਂ ਵਿਖਾਣ ਦੀ ਇੱਛਾ ਪੈਦਾ ਹੋ ਗਈ ਸੀ ਅੰਬਰ ਤੇ ਛੱਡ ਕੇ ਅੰਬਰ ਤੇ ਛੱਡ ਖਾਈ ਜਦੋਂ ਅੰਬਰ ਤੇ ਦੀ ਭੁੱਖ ਪੈਦਾ ਹੋ ਗਈ ਸੀ ਜਿਹੜੀਆਂ ਲੋਕਾਂ ਨੇ ਪੁਰਾਣੇ ਅਕਾਲੀ ਫੂਲਾਸ ਨੂੰ ਖੋਜੇ ਲਾਸਤਾ ਦੂਜਿਆਂ ਨੇ ਢੀੜੋ ਗਈ ਉਹ ਆਪਣੇ ਚੁੱਪ ਕਰਕੇ ਉਹ ਆਪਣੇ ਅੰਬਰ ਤੇ ਰਹੇ ਇਹ ਆਪਣੇ ਵਿਖਾਉਂਦੇ ਰਹੇ ਇਹ ਜਿੱਤੇ ਹੀ ਸਾ ਰਹੇ ਨੇ ਜੱਦੈ ਸੋਨੇ ਜਿਹੜੇ ਨਾ ਗੁਜ਼ਾਰਿਆਂ ਤੇ ਜਿੱਤੇ ਜੁਰਗਿਆਂ ਮੰਦਰ ਤੇ ਸੋਨਾ ਚੜੇ ਜੱਦੈ ਸਭ ਕੁਝ ਹੋ ਰਿਹਾ ਰਾਜ ਕਰੇਗਾ ਖਾਲਸਾ ਵੀ ਆ ਜਿਹੜਾ ਸਲੋਗਨ ਜਦ ਤੇ ਸ਼ੁਰੂ ਹੋਇਆ ਦੇਖਾ ਰਾਜਕੀਏ ਆਜ ਵੇਖਾ ਠੀਕ ਹੈ ਹਾਂਜੀ ਹਾਂ ਗੁਰਮੁਖੀ ਅੰਮ੍ਰਿਤ ਪੀਵਣਾ ਵਾ ਵਾ ਕਰੇ ਲਿਵ ਲਾਈ ਗੁਰਮੁਖੀ ਅੰਮ੍ਰਿਤ ਪੀਣ ਵਾਲੇ ਜਿਹਨਾਂ ਨੇ ਅੰਮ੍ਰਿਤ ਪੀਣਾ ਗੁਰਮੁਖੀ ਗੁਰਮੁਖੀ ਨਾਲ ਅੰਮ੍ਰਿਤ ਪੀ ਗੀ ਨੇ ਅੰਮ੍ਰਿਤ ਪੀਣਾ ਉਹਨਾਂ ਨੇ ਆ ਉਹਨਾਂ ਨੇ ਅਮਰ ਹੋਣ ਸਭ ਹੋਣਾ ਵਾਸਤੇ ਅੰਮ੍ਰਿਤ ਪੀਣਾ ਉਹਨਾਂ ਨੇ ਬਗਵਾਨ ਵਾਸਤੇ ਜ਼ਹਿਰ ਖਾਣੀ ਤੇ ਨੇ ਮਰਨ ਵਾਸਤੇ ਜ਼ਹਿਰ ਖਾਣੀ ਇੱਕ ਵਾਰ ਜੀਵਨ ਹੋਣ ਵਾਸਤੇ ਅੰਮ੍ਰਿਤ ਪੀਣ ਉਹਨਾਂ ਤਾਂ ਬੇਰੇ ਹੀ ਨਹੀਂ ਇਸ ਕਰਕੇ ਆ ਜਿਹੜੀ ਅਸ ਵਿਆਖਿਆ ਹੋ ਰਹੀ ਆ ਪਹਿਲੀ ਵਿਆਖਿਆ ਤਾਂ ਵੇਲ ਨਹੀਂ ਆ। ਕੋਬ ਨਹੀਂ ਸਕਦਾ ਇਹਦਾ ਵੇਲ। ਕੋ ਵਿਖਾਣੇ ਵਾਲਿਆਂ ਦੀ ਆ ਵਿਆਖਿਆ। ਪੁਰੰਧ ਦੀ ਵਿਆਖਿਆ ਕੀਤੀ ਹੋਈ ਆ। ਇਹ ਗੁਰਮੁਖੀ ਵਿਆਖਿਆ। ਠੀਕ ਹੈ ਜੀ। ਹਾਂ ਗੁਰਮੁਖੀ ਅੰਮ੍ਰਿਤ ਵਾਹ ਵਾਹ ਕਰੇ ਲਿਬ ਵਾਹ ਕਰੇ ਲਿਬ ਲਾਏ। ਵਾਹ ਵਾਹ ਕਰਦੇ। ਇੱਕ ਵਾਰ ਇੱਕ ਜਿੱਤੋ ਕੇ ਨਾਨਕ ਵਾਹ ਵਾਹ ਕਰੈ ਸੇ ਜਨ ਨਿਰਮਲੇ ਤੇ ਭਵਨ ਸੋਜੀ ਪਾਈ ਜਿਹੜੇ ਵਾਹ ਵਾਹ ਕਰਦੇ ਨੇ ਉਹੀ ਨਿਰਮਲੇ ਨੇ ਰੰਗ ਕੇ ਨਿਰਮਲੇ ਨਹੀਂ ਬਣ ਸਕਦੇ ਇਹ ਚਿੱਟ ਨੇ ਨਿਰਮਲੇ ਨਹੀਂ ਆ ਭਗਵਾਨ ਪਾ ਕੇ ਪੱਗਾਂ ਬੰਨ ਕੇ ਨਹੀਂ ਨਿਰਮਲੇ ਬਣ ਸਕਦੇ ਨਿਰਮਲੇ ਦੀ ਡੈਫੀਨੇਸ਼ਨ ਆ ਗਈ ਹਾਂ ਗੁਰਮਤਿ ਦੇ ਨਿਰਮਲ ਅਸਿ ਨੂੰ ਕਹਿੰਦਾ ਗੁਰਮੁਖੇ ਨਿਰਮਲ ਆ ਗੁਰਮੁਖ ਨਿਰਮਲ ਇਹਦੇ ਅੰਦਰ ਮਾਇਣਿਓ ਨਿਰਮਲ ਉਦੀ ਸਦੀ ਉਸ ਦੇ ਦੀ ਗੱਲ ਹੈ ਵਾ ਵਾ ਕਰਿਆ ਸੇ ਨਿਰਮਲੇ ਤੇ ਜਨ ਨਿਰਮਲੇ ਜਿੰਨਾ ਅਜਰ ਹਿਰਦੇ ਵਿੱਚ ਮਿਲੀ ਤਾਂ ਹੈ ਮਾ ਦੀ ਭੁੱਖਾ ਕੱਟੇ ਕੋਈ ਹੋਰ ਗੜਬੜਾ ਵਾ ਵਾ ਕੀਤੀ ਹੋਣੀ ਜਾ ਸਕਦੀ ਜੇ ਤਰ੍ਹਾਂ ਮਨ ਇਕੱਠੇ ਹੁੰਦੇ ਨੇ ਤ੍ਰਿਪਵਨ ਸੋਝੀ ਪਾਏ। ਸੋਝੀ ਵਾਣ ਹੋਈ ਆਣੀ ਹੈ। ਉਹਨਾਂ ਨੂੰ ਸਾਦੀ ਕੁਰਬਾਨੀ ਦੀ ਸੋਝੀ ਹੋ ਜਾਂਦੀ ਤ੍ਰਿਪਤ ਹੋ ਜਾਂਦੇ ਨੇ। ਦੇਖੋ ਤ੍ਰਿਪਵਨ ਸੋਝੀ ਪਾਉਣ ਦਾ ਗਿਆਨ ਤਨ ਲੋਕ ਦੀ ਸੋਝੀ ਹੈ। ਤਨ ਲੋਕ ਦਾ ਗਿਆਨ ਆ ਤਨ ਲੋਕ ਦੀ ਸੋਝੀ ਹੋਣੀ ਕੋਈ ਮਾਹੌਲ ਦੀ ਬਜਾਖ ਦੀ ਗੱਲ ਨਹੀਂ। ਇੱਕ ਸਖਜਦਾਵਾ ਕਰਕੇ ਕਹੇ ਮੈਨੂੰ ਤਨ ਲੋਕ ਦਾ ਗਿਆਨ ਹੈ। ਤੁਸੀਂ ਜੇਲਾ ਕੋਈ ਵੀ ਸੰਤ ਦੱਸੇ ਉਹਦਾ ਚੇਲਾ ਦੱਸੇ ਉਹ ਕਿੰਨੇ ਲੋਕ ਦਾ ਗਿਆਨ ਸੀ ਕੁਰਬਾਨੀ ਤੇਨੇ ਲੋਕ ਦਾ ਗਿਆਨ ਤੇਰੇ ਪਵਣ ਸੋਜੀ ਹੈ ਜਿਹਨੂੰ ਤੇਰੇ ਪਵਣ ਸੋਜੀ ਹੈ ਉਹ ਵਿਖਦੇ ਭੜੇ ਪੈਣੇ ਬਾਹਰ ਸੇ ਵਿਖ ਜਾਣਾ ਮਾਇਆ ਦੇਖਾ ਮੁਨਾਫਾ ਜੰਮਾ ਸਮਝ ਨਾ ਨੇ ਬੰਦੇ ਵੀ ਜੰਦੇ ਨੇ ਉਹ ਛਿੱਟੀਆਂ ਜੀਆਂ ਵਿੱਚ ਵਿਚਾਰੇ 40 ਤੇ ਵਧਦੀ ਨਹੀਂ ਹੁੰਦੀ ਉਹਨਾਂ ਦੀ ਸਾਦੇ ਰਹਿੰਦੇ ਨੇ ਚੁੱਪੀਆਂ ਨੂੰ ਰੁਕੀਆਂ ਲੀਆਂ ਰੱਖਦੇ ਨੇ ਕੋਈ ਕੋਈ ਨਹੀਂ ਗਿਆਨ ਹੈ ਜੀ ਉਹ ਇਸਿਆ ਨੂੰ ਭਗਤੀ ਸਮਝਦੇ ਨੇ ਵੀ ਇਹਨਾਂ ਸੀ ਨਾ ਹੋਵੇ ਸਾਦੇ ਦੀ ਕਮੀ ਨਾ ਹੋਵੇ ਕਮੀ ਹੈ ਕੀ ਭਾਵੇਂ ਬਣਦਾ ਜੀ ਜਿਹੜੀ ਮਾਇਆ ਹੈ ਜਿੱਥੇ ਤੱਕ ਮਾਇਆ ਤਿੰਨਾਂ ਪਵਣ ਦੇ ਤੀਰ ਤੋਂ ਬਣ ਜੋਤੀ ਇਹ ਜਿਹੜੀ ਜੋਤ ਆ ਤੈਨੂੰ ਭਵਣ ਚ ਰਹਦੀ ਹੈ। ਕਿਆ ਬਾਜਾ ਜਦ ਸਰੀਰ ਛੱਡ ਜਾਂਦੀ ਹੈ ਉਹ ਵੀ ਇੱਕ ਭਵਣ ਨੇ ਦਾ। ਉਹ ਆਕਾਸ਼ ਵਿੱਚ ਜਿਹੜੀ ਹੁਕਮਾਂ ਦੇ ਵਿੱਚ ਜੁੜੀ ਰਹਦੀ ਹੈ। ਹੁਕਮਾਂ ਦੇ ਸਮਾਈ ਰਹੇ ਆਕਾਸ਼ ਨਾਲ ਜੁੜੀ ਰਹਦੀ। ਕਿਉਂਕਿ ਲਾਈਟ ਆਕਾਸ਼ ਤੋੜਦੀ ਹੋ ਸਕਦੀ। ਜੋਤ ਆਕਾਸ਼ ਤੋੜਦੀ ਹੋ ਸਕਦੀ। ਆਕਾਸ਼ ਜੋ ਤੋੜਦੀ ਹੋ ਸਕਦਾ। ਆਕਾਸ਼ ਆ ਜੋਤ ਨੂੰ ਅਡਰ ਵੀ ਕੀਤਾ ਜਾ ਸਕਦਾ। ਕਦੇ ਵੀ। ਜਦ ਤੱਕ ਹੋਈ ਆ ਹੋਊਗੀ। ਇਜੇ ਕਰਕੇ ਸਾਚੇ ਤੇ ਪਵਨਾ ਪਿਆਲੇ ਕਿ ਪਵਨਾ ਆਟ ਹੋਇਆ। ਠੀਕ ਹੈ ਜੀ। ਮਾਣਾਟ ਹੋਇਆ। ਜਦੂਰ ਬੰਦਾ ਭੁੱਲ ਨਹੀਂ ਹੋਇਆ। ਤੇ ਦੂਸਰਾ ਪਵਨ ਦੂਸਰਾ ਪਵਨ ਤਾਂ ਵੀ ਮਾਣਾ। ਅੱਛਾ ਜੀ। ਤੀਸਰਾ ਮਾਇਆ ਚ ਆਪਾਂ ਜਿਹਦੇ ਚ। ਆ ਤੀਸਰਾ ਹੁਣ ਹੈਗਾ ਹੀ ਆ ਆਪਾਂ ਬੋਲਦੇ ਆ ਜਿੱਥੇ। ਦੇਖੋ ਇਹ ਮੇਤਰੋ ਕਾ ਜਿੱਥੇ ਆਪਾਂ ਬਿਰਵਾਸ ਕਹੀ ਜਾਂਦੇ ਨੇ। ਇਹੇ ਕਾਰਨ ਨੂੰ ਮਾਤ ਲੋਕ ਬਣਿਆ ਹੋਇਆ ਹੈ ਮਾਤ ਲੋਕ ਨਹੀਂ ਬਿਰਤ ਲੋਕ ਹੈ ਇੱਥੇ ਮੌਤ ਲਖਾਂਗੇ ਆਏ ਹਾਂ ਸਭਨੇ ਮਰਨਾ ਇੱਥੇ ਬਿਰਤ ਲੋਕ ਹੈ ਭਰਵਾਲ ਲਖਾਏ ਮੰਡਲਮੇ ਆਏ ਤਾਰੇ ਮਰਨਾ ਲਖਾਏ ਸੰਤਲ ਚਾਏ ਹੋਏ ਪਰ ਜੇ ਕੋਈ ਜੀਵਨ ਚਾਹਦਾ ਮੇਰਾ ਸਾਜਣ ਜੀਵਨ ਹੋਰੀ ਵੇ ਜੀਵਨ ਸਾਜਿਬ ਜੀਵਨ ਸਾਜਣਾ ਪਾਉਗਾ ਕਉ ਪੈ ਜਿੰਨਾ ਜੀਵਨ ਹੈ ਹੈ ਅੱਗੇ ਜੇ ਜੀਵਨ ਵਧਾਉਣੇ ਪੂਰਾ ਕਰਨਾ ਠੀਕ ਹੈ ਸਰੀਆ ਤਾਂ ਉਹੀ ਆ ਕੁੱਟ ਕੇਕ ਨਹੀਂ ਗਲਮ ਕਰਕੇ ਲਮਾ ਕਰਨਾ ਪੈਣਾ ਇਹਦੀ ਨਮਾਈ ਕਾਹ ਕਰਦੀ ਬੈਣੀ ਆ ਭੱਟੀ ਪਾਉਣਾ ਪੈਣਾ ਕੇ ਲਮਾ ਕਰਨਾ ਬਰਨਲ ਖਾਏ ਬੁੱਢਲ ਮੈਂ ਆਏ ਜੀਵਨ ਸਾਜੇ ਭਾਈ ਭਾਈ ਲੱਖਣ ਕੇ ਭਾਈ ਕੋਲ ਬਾਹ ਤੂੰ ਕੋੜਾ ਘੁਰ ਮਾਤ ਪਤ ਮਾਤਾ ਸੰਤੋਖਤਾ جے کسے نے جیون ساجਣਾ ہے ਇੱਛਾ ਸਦਾ ਲਈ جیون ਹਾਸਲ ਨੇ ਬਾਹਰ چلا ਜਾਊਗਾ ਉਹ ਬਣਵਾਣਾ ਤਿੰਨਾਂ ਲੋਕਾਂ ਜੇ ਕੜ ਤਿੰਨਾਂ ਲੋਕਾਂ ਜੇ ਬਿਠਾ ਵੇਖਾਂਗਾ ਤਾਂ ਬਰੂਗਾ ਤਿੰਨਾਂ ਲੋਕਾਂ ਦੇ ਪਦਾਰਥ ਤੋਂ ਦਾਖਾਣਾ ਪੀਣ ਦਾ ਤਿਆਗ ਦਿੰਦਾ ਹੋ ਬੜ ਕਰਕੇ ਸ਼ਰੀਰ ਨੇ ਤਾਂ ਮਰਨਾ ਹੀ ਐ ਸ਼ਰੀਰ ਕਰਕੇ ਨਹੀਂ ਗੱਲ ਬਣ ਕਰਕੇ ਐ ਠੀਕ ਹੀ ਕਿਹਾਕਦਾ ਸੱਚ ਖਾਣਾ ਸੱਚ ਪਹਿਨਣਾ ਸੱਚ ਖਾਣਾ ਸੱਚ ਪਹਿਨਣਾ ਸੱਚ ਦੇ ਲੋਕਾਂ ਤੇ ਪਰੇ ਐ ਠੀਕ ਹੈ ਜੀ ਕਿੰਨੇ ਰੋ ਕੁੜ ਹੈ ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਸੰਸਾਰ ਸਭ ਕੁੜ ਦਾ ਭਰੇ ਆ ਕੁੜ ਵੇਖ ਹੈ ਜਿਹਨੇ ਸੱਚ ਖਾਣਾ ਸੱਚ ਪਹਿਨਣਾ ਉਹਦੋਂ ਲੋਕ ਤੇ ਜੀਵਨ ਸੱਚ ਗਿਆ ਲੀਬੋ ਸੱਜੇ ਮਾਈ ਹਾਂਜੀ ਹੋੜੀ ਹਰ ਕਹਿ ਭਾਣਾ ਗੁਰ ਮਿਲੈ ਸੇਵਾ ਭਗਤੀ ਬਣੀਜੈ ਹਰ ਕਹਿ ਹਰ ਮਨ ਵਸੈ ਚਹੇ ਜੇ ਰਸ ਪੀਜੈ ਹਰ ਕਹਿ ਤਾਂ ਜੇ ਹਰ ਪੀਛਾ ਹੋ ਜਵੇ ਤਾਂ ਗਿਆਨ ਮਿਲਦਾ ਹੋਰ ਵੀ ਨਾ ਹਾਂਜੀ ਹਾਰ ਘੁਰਤਾ ਦੋ ਹੈ ਨਹੀਂ ਹਾਰ ਘੁਰ ਘੁਰ ਕਰਤਾ ਸਰਤਾ ਜੇ ਹਾਨੂੰ ਜੱਗਾ ਲੱਗ ਜਵੇ ਨਾ ਸੱਚ ਵਿਛਾ ਲੱਗ ਜਵੇ ਹਾਨੂੰ ਪਹਿਲਾਂ ਤਾਂ ਗਿਆਨ ਮਿਲਦਾ ਗੁਰਬਾਣੀ ਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਇਹਨੂੰ ਇਹ ਨੂੰ ਕਹਿੰਦਾ ਏ ਠੀਕ ਐ ਬਾਕੀ ਤਿਆਗਦਾ ਹਰਗੇ ਭਾਵਨੇ ਗੁਰ ਮਿਲਦਾ ਤੇਵਾ ਆ ਕਰਕੇ ਸੇਵਾ ਵਾਲੀ ਭਗਤੀ ਉਹਦੇ ਅੰਦਰ ਪੈਦਾ ਹੁੰਦੀ ਏ ਫਿਰ ਸੇਵਾ ਭਾਵਨਾ ਦੀ ਇੱਛਾ ਪੈਦਾ ਹੁੰਦੀ ਏ ਕੇਵਾ ਕੀਤੀ ਨੀ ਜਾ ਸਕਦੀ ਸੁਖ વિના ਸੇਵ ਕੀਤੀ ਸੁਖ ਈ ਜਿਸ ਸੱਚੋ ਸੱਚ ਤੇ ਆਇਆ ਉਹਨਾਂ ਬੰਦੇ ਪੈਲਣਾ ਰੱਖਿਓਨ ਕਰ ਸੁਕ੍ਰਿਤ ਧਰਮਾ ਕਮਾਇਆ ਉਹਨਾਂ ਦੁਨੀਆ ਤੋੜੇ ਸੁਤਨਾ ਅਨਬਾਲੀ ਦੋੜਾ ਖਾਇਆ ਆਂਦੇ ਹਾਲ ਜੁਗੜਨੀ ਸੀ ਆਏ ਉਹ ਚਲ ਹੋਊਗਾ ਸਰੀਰ ਕੋਈ ਕੁਛ ਹੋਰ ਕਰਦੇ ਸੀ ਸਰੀਰ ਕੁਛ ਹੋਰ ਕਰਦਾ ਸੀ ਠੀਕ ਹੈ ਜੀ ਹਰ ਕਹਿ ਪਾਣੇ ਹਰ ਮਨ ਵਸੈ ਸਹਜੇ ਰਸ ਪੀਜੈ ਸਹਜੇ ਰਸ ਪੀਜੈ ਕੰਟ ਗਿਆ ਹੁੰਦਾ ਠੀਕੇ ਦੇ ਬਿਨਾ ਜਿਹੜਾ ਸੱਚ ਪੀਏ ਦੀ ਉਦ ਕਦਾਂ ਜਰ ਬਾਣੀ ਦਿੱਖਦਾ ਗੁਰਬਾਣੀ ਦਾ ਰਸ ਜਿਹੜਾ ਹੈ ਪ੍ਰਾਪਤ ਦੀ ਉਦ ਗੁਰਬਾਣੀ ਪੜਦੇ ਨੇ ਅਰਥ ਵੀ ਕਰਦੇ ਨੇ ਸਮਝ ਆਉਂਦੀ ਨਹੀਂ ਟੁਕੜਪੋੜ ਟੁਕੜਪੋੜ ਦੇ ਵਿੱਚ ਦਾ ਅਰਥ ਕਰਦੇ ਨੇ ਉਹ ਉਦਰ ਦਾ ਟੁਕੜਪੋੜਾ ਨੇ ਵੀਹ ਆ ਤਾਂ ਆ ਕਰਦਾ ਕਾ ਕਰਦਾ ਤੇ ਰਾਸ ਉੱਤੇ ਉਹਨਾਂ ਨੇ ਕੀ ਪੀਣਾ ਠੀਕ ਹੈ ਜੀ ਮੈਂ ਕੋਈ ਟੋਕ ਉਹਨਾਂ ਨੇ ਇਹ ਤੇ ਮੈਂ ਕਿਹੜੇ ਤਰ੍ਹਾਂ ਆਤਾ ਤਾਂ ਘੜਪਕੜਾ ਇਹਨਾਂ ਪੀਣਾ ਪੀਣ ਨਾਲ ਭਲਾਉਂ ਰਾਸਤਾ ਦੇਖਿਆ ਹੀ ਨਹੀਂ ਅਜੇ ਨਾਲ ਕੀ ਹੁੰਦਾ ਠੀਕ ਹੈ ਜੀ ਹਰ ਕਹ ਭਾਣਾ ਹਰ ਮਨ ਵਸੈ ਕਾਕੀ ਭਾਵ ਹੈ ਕੀ ਹੋਵੇ ਜਿਹਰ ਦਾ ਭਾਣਾ ਹੋਵੇ ਤਾਂ ਹੀ ਇਹ ਗੱਲ ਸੰਭਵ ਹੈ ਨਹੀਂ ਹਰਗੇ ਬਾਣੀ ਵਿੱਚ ਰਹੇ ਹਰਗੇ ਬਾਣੀ ਚੱਲੇ ਤਾਂ ਹਰ ਬਾਣ ਬਸੇ ਜਿੱਤੇ ਚੱਲਣਾ ਤਾਂ ਹੀ ਹਰਗੇ ਬਾਣੀ ਚੱਲਿਆ ਜਾਊਗਾ ਜੇ ਤੇ ਅੰਦਰ ਵੀ ਮੈਂ ਹਰਗੇ ਬਾਣੀ ਚੱਲਣਾ ਤਾਂ ਹੀ ਚੱਲਿਆ ਜਾਊਗਾ ਅਜੇ ਧਿਆਨ ਅੰਦਰ ਬਸੇ ਹੋਇਆ ਹੀ ਆ ਠੀਕ ਹੈ ਜੀ ਇਦਾਂ ਤੇ ਆਨਾ ਉਹ ਗੰਦੇ ਮੁੰਡਾ ਜਵਾਨ ਸੀ ਬਹੁਤ ਮਰ ਗਿਆ ਫੇਰ ਇਹ ਨਹੀਂ ਮਨੋਂ ਬਸਦਾ ਲੈ ਜਾ ਰੋਟੀ ਮੇਰੇ ਬੁਰੇ ਤੇ ਚੱਕ ਕੇ ਪਦਾਰਥ ਵੀ ਡੁੱਲੀ ਅਕੇ ਲੱਗਦੇ ਮੈਨੂੰ ਨਹੀਂ ਭੁੱਲਦਾ ਉਹ ਦਾ ਉਹ ਬਸਿਆ ਹੋਇਆ ਤੁਸੀਂ ਕਹਿੰਦੇ ਪਦਾਰਥ ਖਾ ਲੈ ਮੇਰੇ ਨਾਲ ਗਰਦੇ ਲੈ ਜਾਓ ਚੱਕ ਕੇ ਬਸਿਆ ਹੈ ਨੁਦੋਸ ਬਸਿਆ ਹੋਇਆ ਤੇ ਦੁਨੀਆ ਦੇ ਪਦਾਰਥ ਨਹੀਂ ਜੰਮੇ ਲੱਗਦੇ ਫਿਰ दादियां अंदर करके दिखाओ ले आओ मेरे फिर मैं बिना सुख पाई है हर नित लिज्जै सुख सदा बसीजे ये हरके बहाली है जे हर उन अपने تخت पे बिठा हरके تخت ਸਾਹਿਬ ਪਿਤਾ ਬੈਠਾ ਹੀ ਹੈ ਸੁਬਹ ਦੇ ਕਰਕੇ ਵਿਛੜਿਆ ਹੋਇਆ ਕਹਤੋਂ ਜਾਂ ਜਾਗਦਾ ਹਰ ਕੇ ਤਖਤ ਤੇ ਬੈਠਾ ਇਹ ਜਗਾ ਦੀਏ ਉਹਦਾ ਮਤਲਬ ਇਹ ਹੈ ਹਰ ਕੇ ਤਖਤ ਬਹਾਲੀਆ ਜਗਾ ਦੀਏ ਭਲਾ ਜਗਾ ਦੀਏ ਉਹ ਜੇ ਦਿਲ ਦੀ ਕੋਈ ਹੋਈ ਤਖਤ ਤੇ ਇਹ ਦੇਖੇ ਤਖਤ ਤੇ ਬੈਠਾ ਹਰ ਕੇ ਤਖਤ ਬਹਾਲੀਆ ਜਗਾ ਦੀਏ ਅਰਥਾ ਉਹਦਾ ਸੁਬਹ ਰੇ ਭਾਗ बैठा तो ताकत ही है लोग ले चक ले जाकर बैठाने ये घर सदा बसीजे जिस घर सदा बसीजे फिर का र उठ जा के जाऊंगा फिर ताकत तो बैठा ही है फिर का सुबह ना देखू ओ सपना जा देखदा जा नहीं घर झट ਰਾਜ ਕੀਤੇ ਗੁਰੂ ਹੱਥ ਨਾਲ ਲੋਕਾਂ ਦਾ ਰਾਜ ਹੁੰਦਾ ਈ ਹੈ ਹੁਕਮ ਹੁੰਦਾ ਈ ਹੈ ਫਿਰ ਉਹ ਆ ਘਪਟ ਲੈ ਫਿਰ ਸਾਰੇ ਆਂ ਦੀ ਹਾਂਜੀ ਫਿਰ ਰਾਜਾ ਬਣਦਾ ਬਨਾਸੀ ਇਥੇ ਨੂੰ ਬਨਾਸੀ ਰਾਜ ਕਿਹਾ ਕਿ ਤੱਕ ਬੈਜਵੇ ਤੇ ਰਾਜਾ ਹਾਂਜੀ ਹਰ ਕਾ ਭਾਣਾ ਤੈਨੂੰ ਮੰਨਿਆ ਜਿਨ੍ਹਾਂ ਗੁਰੂ ਮਿਲਿਜੈ ਹਰ ਕਾ ਭਾਣਾ ਮਲਾਉ ਕਾਬੂ ਦਾ ਕੀ ਨੇ ਗੁਰੂ ਮਿਲਿੰਦਾ ਗੁਰਬਾਣੀ ਦਾ ਗਿਆਨ ਆ ਗਿਆ ਪੂਰਾ ਪੂਰਾ ਗਿਆਨ ਹੋ ਗਿਆ ਜਾਂਦੇ ਗੁਰ ਗਿਆਨ ਘੱਟ ਬੜਿਆ ਜਿਹੜਾ ਅਦੱਲਾ ਪਟ્રોલ ਪਿਆ ਸੀ ਨਾ ਸਮਝਿਆ ਹੋਇਆ ਸਮਝਿਆ ਸੀ ਨਾ ਪਟ્રોલ ਪਿਆ ਹੋਇਆ ਠਾਗ ਕਰਿਆ ਗੁਰਬਾਣੀ ਦਾ ਜਾਦੇ ਨਾਮ ਆਇਆ ਤੁਰਕੀ ਬਾਣੀ ਜਹਾਨੀ ਨਾਸੀ ਅੰਦਰ ਚਲ ਪੈ ਗਈ ਉਹ ਤੇ ਸੁਰ ਗਿਆਨ ਘਟ ਬੜਿਆ ਉਹ ਗਿਆਨ ਬੜਿਆ ਆਹ ਗੁਰੂ ਬੜਿਆ ਰਿਹਾ ਉਹਨਾਂ ਚਰ ਉਹਨਾਂ ਅਜਰ ਗਿਆਨ ਆ ਜਬ ਫਿਰ ਗੁਰੂ ਹੈ ਪਟੋਲ ਪਿਆਰ ਅੰਦਰ ਘਮਨੇ ਦੇ ਵਿੱਚ ਤੇਰਾ ਰਹਦਾ ਘਮਰੇ ਚ ਪਰ ਨੂੰ ਪੈ ਜਾਏ ਫਰ ਗੁਰੂ ਆ ਰੂ ਰੂ ਰੋਸ਼ਨੀ ਰੋਸ਼ਨੀ ਤੇ ਰੋਹ ਸਕਦੇ ਤੇਰੇ ਦੀ ਜਗਾ ਚਾਹਾਂ ਜਲ ਕਰਦਾ ਜਾਂ ਪٹرول ਨੂੰ ਅੰਗ ਪੈ ਜਾਂਦੀ ਹੈ ਪٹرول ਤਾਂ ਕਮ ਦਾ ਗਿਆਨ ਕੁਛ ਨਹੀਂ ਕਰਦਾ ਉਹ ਨਾ ਜਿੰਨਾ ਜੜ ਤੁਰਕੀ ਬਾਣੀ ਹੁੰਦੀ ਉਹ ਨਾ ਪੂਰੀ ਲੋਝੀ ਨਹੀਂ ਹੁੰਦੀ ਕੁਰਬਾਨੀ ਕਿਹ ਹੈ ਹਰਕਾ ਇਹ ਮੰਨ ਲੈ ਅਸਾਂ ਪਾਣਾ ਜਦ ਬੰਦਦਾ ਚੜ ਫਿਰ ਚੜਖੜੀ ਤੇ ਚੜਦਾ ਜਦ ਫਿਰ ਕਹਿੰਦਾ ਠੇਕਰ ਫੋਰ ਦਲੀਸ ਆਪਣਾ ਸਰੀਰ ਦਿੱਲੀ ਦੇ ਬਾਦਸ਼ਾਹ ਤੇ ਕੇ ਲਉਗ ਉਹ ਛੱਡਣਾ ਚਾਹੁੰਦਾ ਉਹ ਕਹਿੰਦਾ ਮੈਂ ਤੇ ਜੁੱਬੇ ਨਾਲ ਬਾਦਸ਼ਾਹ ਦਾ ਜਾਣਾ ਛੱਡਣਾ ਬਹਾਨੇ ਬਣਾਉਂਦਾ ਬਹਾਨੇ ਬਣਾਉਂਦਾ ਗੁਰੂ ਤੇ ਬਾਦਸ਼ਾਹ ਨੂੰ ਛੱਡਣ ਦੇ ਵਿੱਚ ਤੁਸੀਂ ਵੀ ਪੱਥਰ ਪੂਜਿ ਦੀ ਬੇਬੀ ਪੱਥਰ ਪੂਜਿਨੀ ਤੁਸੀਂ ਜਿਹਨੇ ਉਹ ਨਹੀਂ ਬਹਿਬਦੀ ਬੋਣੋ ਤੁਸੀਂ ਕਾਹਦੇ ਵਿਚਾਲੇ ਆਗੇ ਕਹਿੰਦੇ ਬਾਹਾਂ ਜਿਹਨਾਂ ਦੀ ਪਕੜੀ ਹੈ ਸਰਦੀ ਜੇ ਬਾਹਾਂ ਛੋੜੀ ਹੈ ਤੇ ਇੱਕ ਬਾਦਲ ਬੋਲਿਆ ਧਰ ਪਈਏ ਧਰਬ ਨੂੰ ਛੋੜੀ ਹੈ ਉਹ ਬਹਿ ਨਹੀਂ ਛੱਡ ਸਕਦਾ ਆ ਕਿ ਇਹਨਾਂ ਦੇ ਜਿਹਨੇ ਉਹ ਬੰਦ ਕਰਦੇ ਅੱਜ ਤੇ ਕਿਹਾ ਫਿਰ ਬੇਦੁਖ ਨਾਲ ਇ슬ਾਮ ਬੇਦੁਖ ਨਾਲ ਬੰਦ ਕਰਦਾ